शलोक महला दूसरा कथा कहानी बेदी वेदियानी पाप पुन विचार दे लेना ले देना नरक स्वर्ग अवतार जेडी कथा कहानी वेदਾਂ وچ آئیاں نے اے पाप पुन دی ਵਿਚਾਰ چ لے گئے دو ਸਿਬਤ શાਸਤਰ ਪੁਣ ਪਾਪ ਵਿਚਾਰ ਤੇ पाप, पाप पुण्य ਕੁਰਬਾਨੀ ਸਪਾਈਟਾ ਬੁਢਾਬੀ ਪਾਪ ਉਤੇ ਹਮਰੇ ਵਸ ਲੋਹੀ ਸਭ ਕੁਝ ਹੁਕਮ ਨਾਲ ਹੁੰਦਾ ਪਾਪ ਕੋਲ ਕੁਰਬਾਨੀ ਜੀਣੂ ਮੰਦੀ ਹੈ ਉਹ ਹੋਰ ਹੈ ਸੋਚ ਸਕਦੇ ਹੁਕਮ ਦੇ ਖਿਲਾਫ ਆਪਣਾ ਪਾਣੀ ਚੱਲ ਚੱਲ ਨਹੀਂ ਸਕਦੇ ਜਾਨੀ ਆਪਣਾ ਪਾਣੀ ਚੱਲਣ ਦੀ ਸਾਡੀ ਇੱਛਾ ਹੁੰਦੀ ਜੋ ਮੈਂ ਚਾਹਣਾ ਹੋਵੇ ਐਕਚੁਅਲੀ ਹੁੰਦਾ ਨਹੀਂ ਇਹ ਪਾਪ ਹੈ ਹੁਕਮ ਦਾ ਵਿਰੋਧ ਕਰਨ ਪਾਪ ਹੈ ਹੁਕਮ ਦੇ ਅਨਸਾਰ ਚੱਲਣਾ ਭੁੱਲ ਜਿਹੜੀ ਬੇਦ ਵਿੱਚ ਪਾਪ ਉਨ ਆਇਆ ਉਹ ਇਹ ਕਥਾ ਕਹਾਣੀ ਬੇਤੀ ਆੜੀ ਪਾਪਦ ਵਿਚਾਰਾ ਹਾਂਜੀ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਦੇ ਦੇ ਲੈਣਾ ਕੁਝ ਦੇਣਾ ਪਹਿਲਾਂ दान करना, फिर ओ तो ਦਾ मंग ਕਰਦੀ ਜਿਵੇਂ ਅ ਅਸਾਦੀ ਆਵਾਜ਼ ਦੇ ਵਿੱਚ ਵੀ ਆਇਆ ਹੈ ਜੇ ਦੇ ਦੇ ਮੰਗੇ ਸਹਿਸਾ ਗੁਣਾ ਜਿਹਦਾ ਥੋੜਾ ਬਗਦਾਉ 2000 ਕਰੋੜ ਜਾਂਦਾ ਬਗਦਾ ਕਿਉਂ ਹੈ ਸੁਭਾਅ ਵਾਸਤੇ ਸੁਭਾਅ ਵਾਸਤੇ ਇਹ ਇਹ ਬੜਾ ਦਾੰਡੀ ਹੈ ਬੜਾ ਉਹ ਹੈ ਲੈ ਲੈ ਟੇਕ ਫਸ ਇਹਦੇ ਚ ਸੁਰਗਾ ਨਰਕ ਸੁਰਗਾ ਨਰਕ ਦੇ ਵਿੱਚ ਜਨਮ ਲੈਦਾ ਰਹਿੰਦਾ ਜਿਹੜਾ ਸੰਸਾਰੀ ਦਾਨਪੁਤ ਜਿਵੇਂ ਆਪਾ ਕਰਦੇ ਹਾਂ ਜਿਨ੍ਹਾਂ ਅਸੀਂ ਅਰਦਾਸਾਂ ਕਰਦੇ ਹਾਂ ਉਹ ਉਹੀ ਅਸੀਂ ਅੱਜ ਕਰ ਰਹੇ ਹਾਂ ਜਿਹੜਾ ਹਿੰਦੂਵਾਦ ਵਿੱਚ ਹੋ ਰਿਹਾ ਹੈ ਅਸਾਂ ਦੇ ਵਿੱਚ ਕੀ ਹੈ ਨਾਮ ਹੀ ਤਾਂ ਦਾਲਦ ਕਰਨਾ ਨਾਵੇਂ ਬਗਣਾ ਸਾਫ ਦੀ ਉਹ ਕਮਾਈ ਕਰਦੀ ਲੋੜਦਾਈ ਵਪਾਰ ਕਰਨਾ ਹਰ ਜਾਂ ਤੇ ਨਾਮਾ ਕੇ ਵਪਾਰੀ ਵਪਾਰ ਤਾਂ ਗੱਲ ਨਹੀਂ ਦੋਬਦਾ ਨਾਮਤਾ ਹੀ ਜਨਾਨਾ ਗੁਰਮੁਖਾ ਦਾ ਨਾਮਤਾ ਹੀ ਦਾਣਾ ਨਾਵੇਂ ਲੈਣਾ ਨਾਵੇਂ ਬਾਕੀ ਸਰੀਰ ਦੀ ਜਿੰਮੇਵਾਰੀ ਸਾਡੀ ਦੀ ਹੈ ਉਹ ਪਰਮੇਸ਼ਰ ਦੀ ਜਿੰਮੇਵਾਰੀ ਚਾਹੇ ਕਰੇ ਸਾਧੂ ਅਸੀਂ ਆਪੇ ਹੀ ਸਭ ਕੁਝ ਅਰੇ ਦੀ ਬਹੁਤੀ ਚੇਤਨਾ ਦੀ ਗੱਲ ਹੀ ਹੈ ਲੋ ਜੀ ਤੇ ਇੱਥੇ ਦੇ ਦੇ ਲੈਣਾ ਦੇ ਪਦਾਰਥ ਹੈ ਆ ਦੇ ਰੁਪ ਰਾਗੁਣਾ ਸੰਦੇ ਵਿੱਚ ਜਿਹੜੇ ਛੇ ਘਰ ਬਣੇ ਦਾਨ ਲੈਣਾ ਤੇ ਦਾਨ ਦੇਣਾ ਸਾਰੇ ਖਾਣ ਹੀ ਲੈਣਾ ਲੈ ਕੇ ਜੇ ਦਾਨ ਲੈਂਦਾ ਤਾਂ ਦਾਨ ਦਿੱਤਾ ਵੀ ਉਹ ਲੈ ਲੈ ਦੇਣਾ ਨਹੀਂ ਬ੍ਰਾਹਮਣ ਲੈ ਕੇ ਦਿੰਦਾ ਦਾਨ ਆਪਰ ਅੜਿ ਕਮਾਈ ਜੋ ਨਹੀਂ ਦਦਾ ਉਹ ਵੀ ਤਾਂ ਨਾਲ ਖੋਲ ਕੇ ਬਸਾਰੇ ਰਹੂਗਾ ਬ੍ਰਾਹਮਣ ਮੁਕਤੀ ਤਾਂ ਬ੍ਰਾਹਮਣ ਹੀ ਕਰਦਾ ਬ੍ਰਾਹਮਣ ਤਾਂ ਹੈ ਦੀ ਫਿਰ ਉਹ ਪੜਦਾ ਏਡਾਂ ਦੀਆਂ ਕਥਾ ਕਹਾਣੀਆਂ ਨੂੰ ਉਹਨਾਂ ਦੇ ਪਟਤ ਪਾੜੀ ਬਾਗ ਜਿਹੜੀ ਹੈ ਇਹਦੀ ਬਾਗ ਪਾੜ ਕੇ ਦਾਨ ਮਾਇਆ ਦਾ ਬਣਾ ਲਿਆ ਉੱਥੇ ਇਹ ਵੀ ਬਣਾ ਲਿਆ ਦਾਨ ਦੇਣ ਵਾਲਾ ਜਿਹੜਾ ਹੈਗਾ ਚਾਹੇ ਉਹ ਦੀਜਾਤਾ ਵੀ ਹੈ ਦਾਨ ਦੇ ਸਕਦਾ ਹੈ ਪਰ ਦੇਣ ਵਾਲਿਆਂ ਨੂੰ ਕਹਿੰਦੇ ਦਿੰਦੇ ਧਰਕੀ ਲੈਂਦੇ ਸੁਰਗੀ ਦੇਖੋ ਇਹ ਤੇ ਜਨ ਬ੍ਰਾਹਮਾ ਦਾ ਨਾਮ ਹੈ ਤੇ ਸੁਰਗੀ ਤੇ ਜਾਉਂਗੋ ਚਾਹੇ ਮਦਨ ਰਹਿਦੋ ਪਰ দান ਕਰਨ ਵਾਲਾ ਜਿਹੜਾ ਮਰਦੇ ਜਿਆ ਧਰਕੀ ਜੀ ਇਹਨਾਂ ਦਾ ਹੀ ਰਾਜ ਥੱਕੇ ਚਾਈ ਇਹੋ ਜੀ ਜਿਹੜੀ ਵਿਚਾਰਧਾਰਾ ਸੀ ਪਿੱਛੇ ਉਹਦੀ ਬੈਕਗ੍ਰਾਉਂਡ ਦੀ ਗਿਆਨ ਤੋਂ ਬਿਨਾਂ ਜੀ ਗੁਰਬਾਣੀ ਨੂੰ ਇਸ਼ਾਰੇ ਭੂਜ ਬਗਲਾਂ ਕਹੀ ਹੋਈ ਹੈ ਨਾ ਨਹੀਂ ਸਕਦੇ ਕੁਝ ਚੱਲ ਰਿਹਾ ਜੀ ਪਿੱਛੇ ਉਹਦੇ ਤੇ ਟਿੱਪਣੀਆਂ ਕੀਤੀਆਂ ਹੋਈਆਂ ਹਾਂਜੀ ਤਮ ਜਾਤੀ जिनसी ਜਿੰਸੀ ਪਰਮੀ ਭਵੇ ਸੰਸਾਰ ਉਤਤ ਜਾਤਾ ਸਾਡੀ ਜੇਰੀ ਇਹਨੂੰ पाया ਪਾਇਆ ਜਾਤ ਉਤਤ ਬਜਾਤੀ ਐ ਫਿਰ ਜੀ ਜਾਤੀ ਵੀ ਬਣਾਈ ਹੋਈ ਐ ਇਹ ਉਹ ਆ ਨੇ ਜਾਤਾਂ ਜਿਰਥਾਂ ਦੇ ਵਿੱਚ ਸਾਰੇ ਹੀ ਕਰਤਾ ਜਾਣੀ ਤੇਤਨ ਵਾਢ ਮਾਰਕੀਆਂ ਨੇ ਇਹ ਜਦੋਂ ਉੱਤਪ੍ਰਾਹਮਣ ਛਤਰੀ ਜੀ ਤੇ ਬੋਲ 150 ਬੈਸ ਬਣਾ ਲਏ ਤੇ ਦੀ ਗੱਲ ਅੱਛਾ ਜੀ ਉੱਤਮ ਮੱਧਮ ਜਾਤੀ ਜਿੰਸੀ ਧਰਮ ਪਵੈ ਸੰਸਾਰ ਨੂੰ ਬਸ ਜਾਤੀਆਂ ਦੇ ਚ ਧਰਮ ਹੋਇਆ ਬਸ ਆ ਉੱਤਪੁਣਾ ਜੇ ਤੁ ਬ੍ਰਾਹਮਣ ਬ੍ਰਾਹਮਣੀ ਜਿਹਾ ਕੀਤੀ ਭਗਤਾਂ ਨੇ ਵੀ ਤੇਰੇ ਚ ਵੀ ਉਹੀ ਖੂਨ ਹੈ ਸਾਡੇ ਚ ਉਹੀ ਪਰ ਆਪਣੇ ਆਪ ਨੂੰ ਊਚਾ ਜਾਂ ਨੀਵਾਂ ਲੱਖਿਆ ਤੇਰਾ ਜਨਮ ਹੋਇਆ ਤੇ ਤੂੰ ਕਿਵੇਂ ਮਤਲਬ ਹੈ ਤੂੰ ਹੋ ਗਿਆ ਦੁੱਧ ਦੇ ਵਿੱਚ ਲੱਗੇ ਕੱਪੜੇ ਜਾਮਾ ਹੋਏ ਪਲੀਜ਼ ਰੱਤ ਤਾਂ ਫਿਰ ਕਹਿਣਾ ਨਾ ਵੀ ਹੁਣ ਲਹੂ ਲੱਜਟ ਤੋਹੋ ਉਹ ਜਿਹੜਾ ਦੁੱਧ ਨਾਲ ਤੋਂ ਹੁੰਦੇ ਨੇ ਉਹ ਦੁੱਧ ਨਾਲ ਪਵਿੱਤਰ ਕੰਢੇ ਤੋਂ ਹੁੰਦੇ ਨੇ ਇਹ ਤਾਂ ਟਿਪਟਿ ਕੀਤੀ ਹੋਈ ਹੈ ਤੁਮਾ ਭਈ ਜਿਹੜੀ ਚੀਜ਼ ਤੋਂ ਦੁੱਧ ਤੋਂ ਹੁੰਦਾ ਹੈ ਤੁਹਾਨੂੰ ਜੀ ਹੋਇਆ ਕਿ ਦੁੱਧ ਕੀਮਤੀ ਹਰਿਆ ਜੇ ਚੀਜ਼ ਦੀ ਕੀਮਤ ਜ਼ਿਆਦਾ ਹੋਈ ਪਵਿੱਤਰ ਹੈ ਉਹ ਜਿਹੜੀ ਹੈ ਦੀ ਬਾਤ ਇਹ ਆ ਆਪਕਾ ਸੂਦਨ ਨਾਲ ਤੁਮ ਕਹਤ ਬ੍ਰਾਹਮਣ ਆਪਕਾ ਕਸੂਦ ਹਾਂਜੀ। ਸ਼ੂਦਰ ਤੋਂ ਲੋਹੂ ਤੋਂ ਕਿਉਂ? ਹੂੰ ਹੂੰ। ਕਿਉਂ ਤਾ ਜੇ ਤੂੰ ਦੋਤੋਂ ਇਹ ਗੋਲ ਹੋਈਏ ਫੇਰ ਚੱਲ ਬੰਦ ਸਕਦੇ ਆਂ ਅੰਮ੍ਰਾਲੇ। ਅੱਛਾ ਜੀ। ਵੀ ਇਹ ਵੀ ਜਾਤ ਪਾਤ ਵਿੱਚ ਸਾਡੇ ਖੂਨ ਚੱਲਦਾ। ਹੂੰ ਹੂੰ। ਸਾਹ ਚੱਲਦਾ। ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਔਨ ਬਾਟ ਕਾਹ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਧ ਹਮ ਕਤ ਲੋਹੂ ਤੁਮ ਕਤ ਦੂਧ ਜਿਸ ਖੂਨ ਸਾਡੇ ਅੰਦਰ ਚੱਲਦਾ ਹੈ ਤਾਂ ਤੇਰੇ ਕਿਹੜਾ ਦੁੱਧ ਚੱਲਦਾ ਤੇਰੇ ਬਿਲਕੁਲ ਹਾਂ ਇੱਕੋ ਹੀ ਆ ਤੇਰਾ ਉਹੀ ਵੇਰਾ ਠੀਕ ਹਵਾ ਚ ਦਾ ਸਾਹ ਤੂੰ ਲੈਣਾ ਉਸੇ ਜਿਸੀਂ ਆ ਫੇਰ ਉਹ ਹਵਾ ਦਾ ਝੂਠੀ ਹੋ ਗਈ ਸਾਰੀ ਇੱਥੇ ਪਾਅ ਵਟ ਰੱਖ ਆਡਾ ਹਵਾ ਨੂੰ ਦਮੇ ਕਰੇਗਾ ਠੀਕ ਹੈ ਗਿਆਨ ਪਰਮਾਰਥ ਦੇ ਗਿਆਨ ਹਟ ਕੇ ਸੰਸਾਰ ਦੀ ਜਿਹੜੀ ਮਾਇਆ ਹੋਇਆ ਸਭ ਨੂੰ ਝੂਠ ਹੈ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖੀ ਜਾਤੀ ਸੁਰਤੀ ਕਰਮ ਧਿਆਈ ਗੁਰਬਾਣੀ ਅੰਮ੍ਰਿਤ ਬਾਣੀ ਹੈ ਕਹਿੰਦੇ ਜੇ ਬੋਲੀਏ ਹਮਗਾ ਤਨ ਉਹ ਤੁਮ ਕਾ ਦੂਦ ਇਹ ਅਮਰਤ ਬਾਣੀ ਹੈ ਸੱਚਾ ਅਮਰਤ ਹੁਦਾ ਸੱਚ ਦੀ ਬੋਤ ਨਹੀਂ ਹੈ ਉਹ ਵੇਖ ਰਹਿਣ ਵਾਲੀ ਕੀ ਚਾਰੇ ਗਾਲਾਂ ਚ ਰਹਿਦਾ ਸਾਲ ਸੱਚ ਹੈ ਵੀ ਸਚਨਾ ਨਾ ਕੋਈ ਵੀ ਸੱਚ ਰਹੂਗਾ ਵੀ ਸੱਚ ਹੈ ਇਹ ਅਮਰਤ ਬਾਣੀ ਹੈ ਬਾਣੀ ਗੁਪਤ ਪ੍ਰਗਟ ਹੁੰਦੀ ਹੈ ਇਹ ਰਹਿੰਦੀ ਹਰ ਵਕਤ ਹੈ ਬਾਣੀ ਤਤ ਮਖਾਣੀ ਅਮਰਤ ਬਾਣੀ ਸਤਿਵ ਬੋਖਿਆਨ ਕੀਤਾ ਹੋਇਆ ਸਤਿਵ ਸਤਿਵ ਕਿਹੜੇ ਕੋਲ ਦੱਤਾ ਹੈ ਦੀ ਜਿਹੜਾ ਜਾਸਰ ਪੁੱਤ ਪਾਪ ਬਚਾ ਲਦੇ ਤੱਤ ਸਾਰ ਨੂੰ ਜਾਣਾ ਹੈ ਤੱਤ ਤਾਂ ਖਬਰੇ ਨਹੀਂ ਹੁੰਦਾ ਕਿ ਸੱਚ ਸੱਚ ਹੁੰਦਾ ਸੱਚ ਨਹੀਂ ਹੈ ਉਹਦੇ ਵਿੱਚ ਕੁਝ ਝੂਠ ਹੈ ਅੰਮ੍ਰਿਤ ਬਾਣੀ ਕਰਤਮ ਬਾਣੀ ਸੱਚ ਦਾ ਬੋਖਿਆਨ ਸੱਚ ਦੱਸਿਆ ਹੋਇਆ ਅਸਲੀਅਤ ਸੱਚ ਕੀ ਹੈ ਜੇ ਸੱਚ ਤੇ ਆ ਜੀਏ ਸੰਸਾਰ ਧਰਮਿਕ ਰਹਿ ਜਾਂਦਾ ਦੂਆ ਧਰਮਿਕ ਨਹੀਂ ਹੁੰਦਾ ਬੋਲੀਏ ਸੱਚ ਧਰਮ ਹਾਂ ਇੱਕ ਧਰਮ ਸਾਚਿ ਮੁਸਲਮਾਨ ਨੇ ਉਹ ਕੀ ਕਹਿੰਦਾ ਨੇ ਤੂੰ ਸੱਤ ਕਹਿੰਦੇ ਸੀ ਮੈਂ ਹਾਂਜੀ ਗਿਆਨ ਧਿਆਨ ਵਿੱਚ ਆਈ ਹਾਂ ਧਿਆਨ ਵਿੱਚ ਆਈ ਜਦ ਗਿਆਨ ਸ਼ਬਦ ਵਿਚਾਰ ਅੰਦਰ ਚੱਲਦੀ ਹੈ ਧਿਆਨ ਗਿਆਨ ਤੇ ਧਿਆਨ ਨਾਮਾਇਕ ਨਹੀਂ ਹੁੰਦਾ ਫੇਰ ਪ੍ਰਗਟ ਹੁੰਦੀ ਅੰਦਰ ਉਤਾਉਂਦੀ ਹੈ ਬਾਣੀ ਤੁਰਕੀ ਬਾਣੀ ਆਈ ਸੰਗਲੀ ਚਰਨ ਟੁਟਾਈ ਗਿਆਨ ਧਿਆਨ ਦੀ ਹੋਂਦਾ ਇੱਕ ਸ਼ਬਦ ਵਿਚਾਰ ਦੇ ਵਿੱਚ ਹੀ ਰਹਿੰਦਾ ਬਾਹਰ ਜੱਦਾ ਹੀ ਨਹੀਂ ਕਰੇ ਉਦੋਂ ਫਿਰ ਬਾਣੀ ਪਰਗਟ ਅੰਦਰੋਂ ਫਿਰ ਇਹ 부ਝਾਰਦਾ ਹੈ ਫਿਰ ਉਦੋਂ ਬੁੱਝੀ ਜਾਂਦੀ ਹੈ ਅਸਲ ਪਹਿਲਾਂ ਤਾਂ ਸਮਝਦਾ ਰਹਿੰਦਾ ਫਿਰ ਬੰਦ ਟਿਕ ਜਾਂਦਾ ਤਾਂ ਸਮਝ ਜਾਂਦਾ ਵੀ ਟਿਕ ਜਾਂਦਾ ਟਿਕ ਜਾਂਦਾ ਉਹ ਗਿਆਨ ਵਿੱਚ ਧਿਆਨ ਹੁੰਦਾ ਟਿਕਿਆ ਰਹੇ ਗਿਆਨ ਨਾਲ ਟਿਕਦਾ ਫਿਰ ਗਿਆਨ ਦੇ ਵਿੱਚ ਧਿਆਨ ਗਿਆਨ ਦੇ ਅੰਦਰ ਘੇਰੇ ਦੇ ਵਿੱਚ ਧਿਆਨ ਹੈ ਧਿਆਨ ਬਾਹਰ ਦੀ ਗਿਆਨ ਤੋਂ ਜਿਆਦਾ ਫਿਰ ਬਾਣੀ ਉੱਤੇ ਪ੍ਰਗਟ ਹੁੰਦੀ ਹੈ ਤੇ ਕੋਈ ਤਾਂ ਉਗਬ ਹੈ ਤੇ ਕੋਈ ਫਿਰ ਬਾਣੀ ਉੱਤੇ ਪ੍ਰਗਟ ਹੋਵੇ ਗਿਆਨ ਧਿਆਨ ਵਿੱਚ ਉਸ ਅਵਸਥਾ 'ਚ ਪਰਟਟ ਹੁੰਦੀ ਆ ਦੋ ਹਾਂਜੀ ਗੁਰਮਖੀ ਆ ਆਖੀ ਗੁਰਮਖੀ ਜੱਤੀ ਗੁਰਮਖਾਣਾ ਬੋਲੀ ਆ ਸਾਰੀ ਬਾਣੀ ਗੁਰਮਖੀ ਇੱਕ ਅਵਸਥਾ ਦਾ ਨਾ ਸਾਰੇ ਗੁਰਮਖੀ ਨਾ ਜਿਹੜੀ ਬੱਟੇ ਗੁਰਬਾਣੀ ਉਹ ਜਿੰਨੇ ਵੀ ਗੁਰਬਾਣੀ ਜਿਹਨਾਂ ਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਇੱਕ ਕਮਤੀ ਹੈ ਚਾਹੇ ਕਿਛਾ ਬਦਾ ਚਾਹੇ ਜਿਹੜੀ ਬੇਬਸੀ ਉਹ ਸਾਰਿਆਂ ਦੀ ਇੱਕ ਡਿਗਰੀ ਹੈ ਬਰਾਬਰ ਸਾਕੀ ਖਾਨ ਸਾਰੇ ਗੁਰਮਖੀ ਨੇ ਉਸੇ 200 ਹੁੰਦੇ ਹੀ ਇਹਦਾ ਅਸੀਂ ਆ ਵਟਾ ਪਾਉਣ ਵਾਲੇ ਆ ਗੁਰੂ ਆ ਭਗਤ ਆ ਰਾਨਾ ਜੰਤ ਹੈ ਨਹੀਂ ਹੌਲ ਹੋਣ ਵਾਸਤੇ ਪਉਂਦੀ ਆਪਹੁਣ ਕੁਰਬਾਨੀ ਪਉਂਦੀ ਸੀ ਅਸਲ ਦੇ ਵਿੱਚ ਸੱਚੀ ਪਉਂਦਾ ਉਹਨੂੰ ਸੱਚ ਤੋਂ ਨਾ ਸਮਝੇ ਨੇ ਪਰ ਉਹਨਾਂ ਦੇ ਵੱਡਾ ਮਹਾਪੁਰਸ਼ ਗੁਰਮਖਾਨੇ ਦਾ ਬਾਣੀ ਆਖੀ ਹੈ ਭਾਈ ਬੋਲੀ ਇਹ ਹੁਣ ਜਾਣੂ ਵੀ ਇਹਨੂੰ ਸਮਝੂ ਵੀ ਗੁਰਮਖੇ ਗੁਰਮਖ ਬਾੜਨਾ ਪਉ ਤਾਂ ਸਮਝੂਗਾ ਸਮਝਾਉਂਦੀ ਹੈ ਤੇ ਨਹੀਂ ਆਉਂਦੀ ਇਹ ਫਰਜੀ ਫਰਜੀ ਵੀ ਕਰਮ ਖਾਦਈ ਆਉਂਦੀ ਹੈ ਜਦੋਂ ਆਪਣੀ ਬੁੱਧੀ ਨੂੰ ਸਰੈਂਡਰ ਕਰ ਦਿੰਦਾ ਨਾ ਗੁਰਬਾਣੀ ਤੋਂ ਪੜਦਾ ਗੁਰਬਾਣੀ ਦੂਰੀ ਪੜਦਾ ਗੁਰਬਾਣੀ ਤੋਂ ਹਾਂਜੀ ਸੁਰਤੀ ਕਰਮ त्याਈ ਹਾਂ ਸੁਰਤੀ ਕਰਮ त्याਈ ਸੁਰਤੀ ਉਹਦੀ ਠੀਕ ਰਹੇ ਜੁੜੀ ਰਹੇ ਪਾਣੀ ਦੇ ਵਿੱਚ ਗੁਰਮਖ ਦੀ ਸੁਰਤੀ ਟਿਕੀ ਰਹੇ ਤੇ ਉਹਦੇ ਤੇ ਕਿਰਪਾ ਪਰਮੇਸ਼ਰ ਦੀ ਹੋਵੇ ਪਾਸਰੋ ਦੇ ਧਿਆਨ ਧਿਆਈ ਲਫਜ਼ ਬਹੁਤ ਇੰਪੋਰਟੈਂਟ ਗੁਰੂ ਨਾਨਕ ਲਈ ਧਿਆਏ ਇਹ ਗੁਰੂ ਨਾਨਕ ਦੇ ਧਿਆਨ ਜਾਈ ਭਗਤਾਂ ਦੇ ਬਹੁਤ ਫੇਰ ਜਿਹੜੇ ਹੋ ਗਏ ਸਾਰੇ ਨਹੀਂ ਸੀ ਪ੍ਰਚਾਰ ਹੋ ਰਿਹਾ ਗੁਰਵਾ ਦਾ ਅੱਖਾਂ ਦੇ ਅਰਥ ਕਰਤੇ ਸੀ ਕਿਰਪਾ ਹੋ ਜਾ ਤਾਂ ਕਿਸੇ ਦੇ ਧਿਆਨ ਤੇ ਆ ਜਾਂਦੀ ਹੈ ਉਹ ਬੁਝਾਰਤ ਬੁਝ ਲੈਂਦਾ ਉਹਦੀ ਸਮਝ ਆ ਜਾਂਦੀ ਕਿ ਧਿਆਨ ਦੇ ਵਿੱਚ ਹੀ ਆਉਂਦੀ ਹੈ ਤੁਣ ਮੈਂ ਧਿਆਨ ਧਿਆਨ ਮੈਂ ਜਾਣਿਆ ਜੋ ਕੋ ਜਾਣਿਆ ਧਿਆਨ ਦੇ ਵਿੱਚ ਹੀ ਜਾਣਿਆ ਜਿਨਾ ਜਿਹੜੇ ਧਿਆਨ ਟਿਕਿਆ ਰਿਹਾ ਤਾਂ ਉਹਨਾਂ ਜਿਹੜੇ ਜਾਣਣ ਹਾਂਜੀ ਹੁਕਮ ਸਾਜ ਹੁਕਮੇ ਵਿੱਚ ਰੱਖੈ ਹੁਕਮੇ ਅੰਦਰ ਵੇਖੈ ਹੁਕਮ ਸਾਜ ਹੁਕਮ ਤਾਂ ਸਭ ਕੁਝ ਸਾਡੇ ਲਈ ਕੀਤੀ ਹੈ ਪਰ ਦੇਖੋ ਹੁਕਮ ਨਾਲ ਹੁਕਮ ਨਾਲ ਬਣੇ ਜਦੋਂ ਤੱਕ ਮਾਇਆ ਹੁਕਮ ਨਾਲ ਬਣੇ ਹੁਕਮ ਨਾਲ ਰੱਖਿਆ ਹੁਕਮ ਦੇ ਵਿੱਚ ਰੱਖਦਾ ਸਾਰਿਆਂ ਨੂੰ ਅਸੀਂ ਜਿਹੜੇ ਆ ਅਸੀਂ ਉਹਨਾਂ ਦੇ ਸਕਦੇ ਕਿੰਨ ਸੂਰੀ ਸਾਰੇ ਹੁਕਮ ਦੇ ਵਿੱਚ ਦੇ ਕਿ ਨਜ਼ਰਾਸਤ ਲਾਈਨ ਦੇ ਵਿੱਚੇ ਚੱਲਦੇ ਰਹੋ ਹੁਕਮ ਹੈ ਅੰਦਰ ਦੇਖਾ ਹੁਕਮ ਦੇ ਦੁਆਰਾ ਹੀ ਨਾਨਕ ਅਗੋਂ ਹਮੇ ਟੁੱਟੇ ਤਾਂ ਕੋ ਲਿਖੀਐ ਲਿਖੈ ਹਨ ਜੇ ਕਿਸੇ ਤੇ ਹੋਂਦ ਟੁੱਟ ਜਵੇ ਆਪਣੀ ਸਾਥੀ ਬਰੋਹ ਕਰਦੇ ਜੀ ਕੁਰਬਾਨੀ ਦਾ ਜੇ ਹੁਕਮ ਦਾ ਵਿਰੋਧ ਕਰਨ ਵਾਲਾ ਨਾ ਕੋ ਆਪਣੇ ਰੂਪੇ ਤੋੜ ਦੇਵੇ ਛੱਡ ਦੇਵੇ ਤਿਆਗ ਦੇਵੇ ਟੁੱਟ ਜਵੇ ਕਿਸੇ ਦੀ ਉਹ ਟੁੱਟ ਜੀ ਉਹਨਾਂ ਤੇ ਉਹ ਰੂਪ ਆ ਦੇ ਰੂ ਤਾ ਕੋ ਲਿਖਿਆ ਲੇਖ ਫੇ ਕੋਈ ਸਮਝਦੋ ਹੋ ਦੀ ਗੱਲ ਦੱਸ ਸਕਦਾ ਵਰਨਾ ਵੇਗਨੀਆਂ ਤਾਂ ਮਾਰੀਆਂ ਹੋਈਆਂ ਹੀ ਨੇ ਲੋਕਾਂ ਦੀ ਦੁਪਹਿਰੇ ਦਰਦ ਭਰੇ ਪੈਲੇ ਅਸਲੀਆਂ ਦੇ ਛੱਕੀ ਵਾਲੀ ਜਿਵੇਂ ਆਖੀ ਦਿੱਤੀ ਆ ਲਿਖੀ ਜਾ ਸਕਦੀ ਠੀਕ ਹੈ ਜੀ ਉਹ ਵੀ ਟੁੱਟੀ ਬੇਦ ਉਹ ਬੰਨਾ ਉਹ ਦਾ ਵਿਰੋਧ ਕਰ ਸੀ ਜੀ ਤਾ ਕੋ ਲਿਖੀਏ ਲੇਖੇ ਲਗੀ ਭਾਬਾ ਜੀ ਆ ਤਾ ਤਾ ਤਾ ਕੋਈ ਲੇਖ ਲਿਖ ਸਕਦਾ ਜੇ ਆਪਾਂ ਲੇਖ ਨਹੀਂ ਲਿਖਦੇ ਆ ਜੇ ਕੋਈ ਲਿਖਤ ਕੋਈ ਸੱਚ ਦੀ ਕੋਈ ਲਿਖਤ ਕੋ ਕੋ ਬਾਰੇ ਕੋਈ ਸੱਚ ਬਖਾਣ ਕਰ ਸਕਦਾ ਲਿਖ ਸਕਦਾ ਗੁਰਬਾਣੀ ਜਿਹਨਾਂ ਦੀ ਹੋਂਮੇ ਟੁੱਟੀ ਹੈ ਉਹਨਾਂ ਨੇ ਉਚਾਰੀ ਪੁਰਾਣੇ ਉਚਾਰੀਆ ਲਿਖੀ ਵੀ ਹੈ ਉਹਨਾਂ ਨੇ ਠੀਕ ਹੈ ਉਹੀ ਉਚਾਰ ਲਿਖਣਾ ਇੱਕ ਗੱਲ ਹੋਗੀ ਇੱਕ ਜੀ ਹਾਂਜੀ ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬਿਓ ਜੋ ਬੀਜੇ ਸੋ ਉਗਵੇ ਖਾਂਦਾ ਜਾਣੇ ਜੀਵ ਦੇਖੋ ਵੇਦ ਦੇ ਵਿੱਚ ਪਾਪ ਦੀ ਵਿਚਾਰ ਵੀ ਹੈ ਇਹਦਾ ਮਤਲਬ ਇਹ ਨਹੀਂ ਕਿ ਵੇਦ ਨੂੰ ਅਸੀਂ ਰਿਜੈਕਟ ਕਰਦਾ ਉਹਦੇ ਚਾਰ ਪ੍ਰਕਾਰ ਦਾ ਗਿਆਨ ਦੇ ਦੇ ਵਿੱਚ ਉਹ ਚਾਰ ਪ੍ਰਕਾਰ ਦਾ ਗਿਆਨ ਗਿਆਨ ਗੁਰੂ ਜੀ ਉਹ ਚਾਰਾਂ ਸ਼ਰੂ ਕਰਨੀ ਦੱਸਦੇ ਨੇ ਰੋੜਾ ਹੋੜਾ ਬਾਟ ਦਾ ਫਿਰ ਰੋੜਾ ਪਿਆ ਤਾਂ ਪਿਆ ਫਿਰ ਖੇ ਫਿਰ ਪਾਣੀ ਫਿਰ ਹੱਜਾਂ ਨੇ ਅਸਾ ਚਾਹੀਏ ਜੈਸਾ ਹਰ ਵੀ ਰਸਤਾ ਪਰ ਉਹ ਕੀ ਜਿਹਾ ਸਵਾਲ ਹੈ ਜੇਦ ਕਿਸੇ ਕਹੋ ਮੱਤ ਝੂਠੇ ਝੂਠਾ ਜੋਰ ਦਾ ਵਿਚਾਰ ਹੈ ਜੇ ਉਹ ਪਊਗੀ ਦੇਵਤਾ ਦੇ ਨਾਲ ਮਕਾਨ ਨਹੀਂ ਬਣ ਸਕਦਾ ਇਹ ਥੱਲੇ ਤੋਂ ਲੈ ਕੇ ਉੱਤੇ ਤੱਕ ਉਹ ਚਾਰ ਇਹ ਚਾਰ ਬਦਲਾਵ ਬਣਦਾ ਹੈ ਪਰ ਉਚਿਤਮ ਕੀ ਹੈ ਨਾਮ ਨਾਮ ਤੱਕ ਪਹੁੰਚਣ ਵਾਸਤੇ ਸਾਰਾ ਕਰਨਾ ਹੀ ਪਊਗਾ ਰੇਡ ਵਿੱਚ ਜਿਹੜਾ ਪੁੰਨ ਪਾਪ ਦਾ ਹੀ ਹੈ ਨਾ ਉਹ ਹੈ ਉਹਦੇ ਵਿੱਚ ਰੇਡ ਪੁਕਾਰੇ ਪੁੰਨ ਪਾਪ ਪਰ ਪੁੰਨ ਪਾਪ ਉੱਥੇ ਇਹ ਵੀ ਹੈ ਕਿ ਸੁਰਗ ਨਾ ਕੇ ਰਹੂਗਾ ਉਹ ਕਿ ਹੋਊਗੀ ਜ਼ਰੂਰ ਗੁੱਦੀ ਪਰ ਕਦੇ ਉਦ ਉੱਤੀ ਜਣੀ ਕੀ ਕਦੇ ਨਹੀਂ ਚਲੀ ਗਈ ਕਦੇ ਬੁੱਧੀ ਡਿਵੈਲਪ ਹੋ ਗਈ ਕਦੇ ਨਹੀਂ ਚਲੀ ਗਈ ਐ ਰਹੂ ਗਾ ਇਹ ਜਿਹੜਾ ਸੁਰਗ ਨਰਕ ਦੇ ਜਿਹੜਾ ਪਾਪ ਦੀ ਗੱਲ ਚੱਲਦੀ ਜਿੱਥੇ ਮੁਕਤੀ ਨਹੀਂ ਮਿਲਦੀ ਜਿੱਥੇ ਗੱਲ ਪੁਰਪਾਪ ਦੀ ਵਿਚਾਰਾ ਮੁਕਤੀ ਹੈ ਦੀ ਉੱਥੇ ਚੌਵੀ ਜੇ ਸੋਕਾ ਜਿਹੜਾ ਬੀਜੂ ਉਹੀ ਲੱਗੂਗਾ ਉਦਨ ਇਹ ਤਾਂ ਸੱਚ ਬੀਜ ਲਿਆ ਤੇ ਪਾਪ ਬੀਜ ਲਿਆ ਉਸ ਪਾਪ ਜੋ ਬੀਜ ਦੇਤੇ ਸਭ ਧਰਮ ਰਾਏ ਕੇ ਜਾਣ ਉਦ ਧਰਮ ਰਾਏ ਦੇ ਜਾਉਗੇ ਧਰਮ ਰਾਏ ਤਾਂ ਫਿਰ ਜਨਮ ਹੀ ਦੇਊਗਾ ਉਹ ਫਿਰ ਹੋ ਜਾਣਗੇ ਮੁਕਤੀ ਹੋ ਜਾਣਗੇ ਚਾਰ ਪਦਾਰਥ ਵੀ ਹੋ ਸਕਦੇ ਨੇ ਦੋ ਵੀ ਹੋ ਸਕਦੇ ਨੇ ਹਾਂਜੀ ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਉ ਸੱਚ ਬੀਜੇ ਸੱਚ ਉਗਵੇ ਦਰਗਾ ਪਾਈਏ ਥਾਂ ਗਿਆਨ ਜਿਹੜਾ ਹੈਗਾ ਇਹ ਗਿਆਨ ਦਾ ਨਦਰੂ ਓਕੜ ਹੈ ਉਹ ਬਚੇ ਨੀ ਕੁ ਗਿਆਨ ਦਾ ਮਤਲਬ ਤੱਕ ਗਿਆਨ ਹੈ ਇੱਕ ਜਿੱਤੇ ਆਖ ਗਿਆਨੇ ਪਹੁੰਚ ਜਾਂਦਾ ਨਾ ਇੱਕ ਰਹਿ ਜਾਂਦਾ ਸਭ ਦਾ ਦੇਖੋ ਇੱਕ ਲੈਵਲ ਹੈ ਗਿਆਨ ਦਾ ਜਿਹੜੇ ਆਦਮੀ ਹੈ ਦੀ ਬਾਣੀ ਇਹ ਗਿਆਨ ਦੀ ਗੱਲ ਹੈ ਗੁਰਮਤਿ ਗਿਆਨ ਇੱਕ ਮਰਦ ਜਿਆਦਾ ਹੋ ਜਾਂਦਾ ਫਿਰ ਅਟੋ ਅਟੋ ਕਿਸਮ ਦਾ ਗਿਆਨ ਜੀਂਦਾ ਬੰਦੇ ਲੈਵਲ ਦਾ ਗਿਆਨ ਬਹੁਤ ਵਚਨ ਬੱਡੇ ਲੈਵਲ ਦਾ ਗਿਆਨ ਗੁਰਮੁਖ ਜਿਹਦੇ ਗੁਰਮਤਿ ਨਾਲ ਉਹਦਾ ਗਿਆਨ ਅਟਵੜੇ ਫਿਰ ਗੁਰਮਖੀ ਨਾਲ ਉਹਦਾ ਗਿਆਨ ਦਾ ਲੈਵਲ ਇੱਥੇ ਉਹ ਗਿਆਨ ਉਪਰ ਗਿਆਨ ਉਪਰ ਚਲਾਏ ਫਟਾ ਕਰ ਕਿਆ ਵੀ ਨੂੰ ਪਟਾ ਕਰਕੇ ਬੰਨਣਾ ਚਾਹੀਦਾ ਇਹਦੀ ਸਿੱਖ ਸਲਾਹ ਹੈ ਵੱਡਾ ਗਿਆਨ ਹੈ ਸੰਸਾਰ ਵਿੱਚ ਗਿਆਨ ਵੱਡਾ ਉਹ ਕਿਹੜਾ ਗਿਆਨ ਆਤਮ ਗਿਆਨ ਹੋ ਜਿਹੜਾ ਇੱਕੋ ਗਿਆਨ ਆਤਮ ਗਿਆਨ ਸਭ ਤੋਂ ਵੱਡਾ ਹੋਰ ਸੰਸਾਰੀ ਗਿਆਨ ਵੀ ਹੈ ਤਦਾਰ ਸਾਡੇ ਗਿਆਨ ਬੋਡੀ ਦੇ ਗਿਆਨ ਹੋ ਰਹੇ ਵਟਾ ਕਰ ਸੱਚੇ ਸੱਚਾ ਨੂੰ ਸੱਚ ਦਾ ਗਿਆਨ ਜਿਹੜਾ ਹੈ ਸੱਚ ਦਾ ਗਿਆਨ ਸੱਚ ਤੋਂ ਮਿਲਦਾ ਸੱਚਾ ਨਾ ਹੋਣਾ ਉਹ ਗਿਆਨ ਵੀ ਸੱਚਾ ਜਿਹੜਾ ਸੱਚ ਤੋਂ ਵੀ ਪ੍ਰਾਪਤ ਹੋਉਂਦਾ ਸੱਚੋ ਸੱਚਾ ਸੱਚਾਰਾ ਸੱਚ ਤੋਂ ਹੀ ਸੱਚ ਦਾ ਗਿਆਨ ਪ੍ਰਾਪਤ ਹੋ ਸਕਦਾ ਵੱਨ ਮੁਖ ਜਿਹੜਾ ਬੰਦੇ ਲੈਵਲ ਦਾ ਗਿਆਨ ਹੈ ਉਹ ਤਾਂ ਠੁਠਾ ਹੈ ਇਹ ਤੋਂ ਸੱਚਾ ਗਿਆਨ ਪ੍ਰਾਪਤ ਹੋ ਸਕਦਾ ਉਹਨਾਂ ਵੱਸ ਤੋਂ ਸੱਚ ਦਾ ਗਿਆਨ ਪ੍ਰਾਪਤ ਕਿਹੜਾ ਬਦਲਦਾ ਲਈ ਹੋ ਸਕਦਾ ਜਿਹੜੇ ਬਲਾਏ ਬੋਲੇ ਨੇ ਭਰਤ ਬਲਾਏ ਕੀ ਨਾ ਸੱਚ ਸਭਨਾ ਦਾ ਖਸਮ ਹੈ ਜਦ ਬਲਾਇਆ ਬੋਲੇ ਖਸਮਾ ਕਾ ਕਹਿੰਦਾ ਹੈ ਤੇ ਇਹ ਉਹਨਾਂ ਦਾ ਮਤਲਬ ਹੈ ਸੱਚ ਬਲਾ ਰਿਹਾ ਮੈਂ ਬੋਲ ਰਿਹਾ ਹਾਂ ਜਗ ਮੇਰਾ ਨਹੀਂ ਹੈ ਬਾਣੀ ਸਾਡੀ ਨਹੀਂ ਹੈ ਇਹਦਾ ਨੂੰ ਗੁਰਬਾਣੀ ਹਾਂਜੀ ਸੱਚ ਬੀਜੇ ਸੱਚ ਉਗਵੇ ਦਰਗਾ ਪਾਈ ਇਥੋਂ ਵਾਹ ਜੇ ਸੱਚ ਬੀਜੂਗਾ ਅੰਦਰ ਸੱਚੇ ਲੱਦ ਨਾ ਚੱਲਿਆ ਕੋਈ ਇੱਥੇ ਵੀ ਵੇਦ ਨੂੰ ਔਕੜ ਹੈ ਹੁਣ ਫੇਰ ਇਹਦੇ ਵੇਦ ਦਾਸਤ ਗਿਆ ਨੇ ਨਾਮ ਨਾਮ ਕੇ ਆਜਾ ਨੋਮੇ ਕੇ ਵਪਾਰੀ ਗਿਆਨ ਨੂੰ ਔਕੜ ਹੈ ਜਿਹੜੇ ਵੇਦ ਵਪਾਰੀ ਨੇ ਗਿਆਨ ਤੇ ਜਿਹੜੀ ਵਪਾਰ ਕਰਦੇ ਨੇ ਨਾਮ ਦਾ ਵਪਾਰ ਕਰਦੇ ਨੇ ਗਿਆਨ ਹੀ ਰਾਸ ਹੋਵੇ ਤੇ ਕੋ ਗਿਆਨ ਦਾ ਵਪਾਰੀ ਹੈ ਗਿਆਨ ਹੀ ਰਾਸ ਹੋਵੇ ਤੇ ਹੋਰ ਕੀ ਹੋਊਗਾ ਵਸਤੂ ਉਹੀ ਹੋਊ ਜਿਹੜੀ ਕੀ ਤਾਂ ਵਪਾਰ ਕਰਨਾ ਕਰਵੀ ਪੱਲੇ ਤੋਂ ਬੜੇ ਭਾਗਾ ਨਾਲ ਪੱਲੇ ਪੱਦੀਆਂ ਇਹ ਬਸ ਜਿਹੜੇ ਬਖ ਖੁਦਾਵੀ ਆਦਮੀ ਦੇ ਪੱਲੇ ਪੈਦੀ ਹੈ ਜੀਵਨ ਚ ਉਹ ਤੋਂ ਵੱਡੇ ਭਾਗ ਨਹੀਂ ਹੋ ਸਕਦੇ ਕਿਸੇ ਕਰ ਪੱਲੇ ਨੇ ਵੱਡੇ ਭਾਗਾਂ ਕਰਕੇ ਪਰਮેશਰ ਦੀ ਪੂਰੀ ਕਿਰਪਾ ਕਰਕੇ ਪੂਰੀ ਕਨੇਰੀ ਕਿਰਪਾ ਨਾਲੇ ਪੱਲੇ ਪੈਂਦੀ ਹਾਂਜੀ ਨਾਨਕ ਰਾਸੀ ਬਾਹਰਾਂ ਲੱਦਣਾ ਚੱਲਿਆ ਕੋਈ ਚਲੋ ਨਾਨਕ ਰਾਸੀ ਬਾਹਰਾਂ ਕਦੇ ਕੋਈ ਜਿਹਦੇ ਕੋਲ ਨਾਮ ਦੀ ਰਾਤ ਨਹੀਂ ਹੈ ਹਾਂਜੀ ਦੱਤ ਨੇ ਚੱਲਿਆ ਕੋਈ ਤੇ ਲੈ ਕੇ ਕਦੇ ਕੁਝ ਨਹੀਂ ਗਿਆ ਅੱਜਾ ਝੋੜੀ ਪਰ ਕੇ ਕੀ ਖਾਲੀ ਹੱਥ ਪਿਆ ਰੰਗ ਤਾਂ ਸਾਡੇ ਯਾਦ ਕੁਝ ਨਹੀਂ ਹੈ ਨਾਮ ਤੇ ਵੀ ਲੋ 1000 ਕੇ ਨੋਬਨ ਅੱਗੇ ਲਈਏ ਖੋਏ ਬਾਕੀ ਸਭ ਕੁਝ ਠੀਕ ਜਿਹਾ ਰੱਖਿਆ ਹੋਰੇ ਤਾਂ ਸਾਡੀ ਜੀ ਸਾਰੀ ਰੱਖ ਜਾ ਨਾਮ ਸੱਚ ਦੀ ਚੀਜ਼ ਲੈ ਜਾ ਭਾਈ ਸੱਚ ਲੈ ਜਾ ਜੇ ਸੱਚੀ ਜੀ ਉਹ ਵੀ ਕੋਈ ਛੇੜਦਾ ਤੇਰਾ ਉੱਡੋਰੇ ਛੱਡ ਜਾ ਸੱਚ ਲੈ ਜਾ ਦੀ ਧੂਰ ਦੀ ਇਲਟਰੀ ਹੈ ਇੱਥੇ ਦੇਖੋ ਪਹਿਲਾ ਸ਼ਲੋਕ ਗੁਰੰਗਤ ਸਾਹਿਬ ਦਾ ਸੀ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਪਾਇਆ ਪੰਜਵੇਂ ਨਾਲ ਕੀਤੀ ਹੋਈ ਹੈ ਦੋਹਾਂ ਦੇ ਵਿੱਚੋਂ ਤਾਂ ਦੇ ਅਰਥ ਇੱਕ ਨੇ ਇਸ ਕਰਕੇ ਗੁਰਬਾਣੀ ਗੁਰਬਾਣੀ ਨੂੰ ਅਰਥਾਉਂਦੀ ਹੋਈ ਹੈ ਠੀਕ ਹੈ ਇਹਦਾ ਇਹੀ ਭਾਵ ਹੈ ਕਿ ਇਹ ਇਸ ਤਰ੍ਹਾਂ ਲਿਖੀ ਹੈ ਚੰਗੀ ਤਰ੍ਹਾਂ ਅੰਦਰੜ ਹੋ ਜਵੇ ਪਹਿਲੇ ਸ਼ਲੋਕ ਦਾ ਦੂਸਰੇ आप ਜਹਰੀ ही ਹੋ ਜਵੇ ਉਹਦੇ ਵਿੱਚ ਕੋਈ ਐਵੇਂ ਹੋਰ ਕੁਝ ਗਲਤ ਸਮਝੋਗੇ ਹਾਂ ਜੀ ਪੌੜੀ ਨਿੰਮ ਬਿਰਖ ਬਹੁ ਸੰਚੀ ਐ ਅਮਰਤ ਰਸ ਪਾਇਆ ਬੀਸੀਰ ਮੰਤਰ ਵਿਹਾਈਐ ਬਹੁ ਦੁੱਧ ਪੀ ਆਇਆ ਜਿਹੜੀ ਦਿੱਕੂ ਤੇਰੇ ਨੇ ਤਾਦਰ ਸ਼ਰਦ ਹੈ ਕਹਿੰਦੇ ਉਹਨੂੰ ਅਮਰਤ ਨਾਲ ਚਾਹੇ ਰੋ ਸਿੱਧੀ ਜਾਓ ਅਮਰਤ ਜਦ ਨਹੀਂ ਧੋਕਾ ਪਾਣੀ ਨਾ ਪਾਏ ਤੇ ਜੀ ਬਿਠੇ ਪਾਣੀ ਦੇ ਬਿਬਲੀ ਬਿਠੇ ਦੀ ਜੇ ਮਕੌੜੀ ਹੋ ਰਹੂਗੀ ਉਹ ਬਿੱਟਾ ਧਰਤੀ ਤੇ ਰਹਿ ਸੱਪ ਨਹੀਂ ਹੁੰਦਾ ਜੋ ਵੀ ਜਲੇ ਦੇ ਤੇ ਲੈ ਲੈ ਵੀ ਕਿਹਾ ਹੈ 나ਗੀ ਵੀ ਇੱਕ ਸੱਪ ਉਹ ਦੇ ਵਿੱਚ ਹੈ ਨਾ ਛੁਬਗੀ ਦੇ ਦਿਖਾਇਆ ਇਹ ਉਹਦੇ ਚੇਲਿਆਂ ਨੂੰ ਕਿਹਾ ਹੈ ਗੁਰੂ ਨਾਨਕ ਦੇਵ ਕਿੰਨਾ ਉਹਨਾਂ ਦੇ ਨਾਲ ਚਰਚਾ ਕੀਤੀ ਗੁਰਬਾਣੀ ਦੀ ਇਹਦਾ ਨੇ ਵੀ ਕੀਤੀ ਹੈ ਸਿੱਧਾ ਚਰਚਾ ਜੋਗੀਆਂ ਨਾਲ ਚਰਚਾ ਪਖਤਾ ਨੇ ਕਿਸੇ ਤੇ ਕੋਈ ਅਸਰ ਨਹੀਂ ਪਿਆ ਉਹਨਾਂ ਨੇ ਮਨਿਆ ਹੀ ਨਹੀਂ ਉਹਨੇ ਅਸੀਂ ਤਾਂ ਮੰਨ ਲਈ ਜੀ ਜੋ ਸਾਡੀ ਗੱਲ ਅਸੀਂ ਤਾਂ ਉਹੀ ਰੱਖਣੀ ਜਿੰਨਾ ਮਰਜੀ ਅੰਮ੍ਰਿਤ ਛੀਂਡ ਲੈਣ ਉਹ ਲੈ ਲੈਣ ਹੋਤੇ ਸੁਣ ਲੈਣ ਉਹ ਦੁੱਧ ਪਿਆਈਏ ਜਿੰਨਾ ਮਰਜੀ ਉਹਨੂੰ ਦੁੱਧ ਪਿਆਈਏ ਹਾਂਜੀ ਗੁਰਬਾਣੀ ਛਿੱਟੀ ਮਰਜੀ ਉਹ ਤੇ ਦੋ ਠੀਕ ਹੈ ਜੀ ਗੁਰਬਾਣੀ ਜਿੱਦੀ ਮਰ ਸੁਣ ਲੈਣਗੇ ਉਹ ਅਸਰ ਕੋਈ ਠੀਕ ਬਾਣੀ ਦੁੱਧ ਹੈ ਜੀ ਬਹੁਤ ਦੁੱਧ ਪੀ ਆਇਆ ਆ ਬਾਣੀ ਦੁੱਧ ਹੈ ਠੀਕ ਹੈ ਜੀ ਕਹੇ ਭਾਈ ਆਪਾਂ ਦੂਏ ਸੱਫ ਕੇ ਗਹਿਰੇ ਬਾੜੀ ਹਾਂਜੀ ਮਨਮੁਖ ਆਪੇ ਨੰਨਾ ਭੇਜਿਆ ਹੀ ਪੱਥਰ ਹੁੰਦਾ ਆਪੇ ਤੇ ਉਹਦਾ ਮਨ ਲਈ ਭੁੱਜਦਾ ਹੱਸ ਉਹਦੀ ਭੁੱਜਦਾ ਹੈਗਾ ਜਿਵੇਂ ਸੁਲਾਈ ਜਾਂਦੇ ਆ ਉਤੇ ਕੋਈ ਅਸਰ ਨਹੀਂ ਐਵੇਂ ਮਨਮੁਖ ਦਾ ਇੱਟ ਕਰਕੇ ਬਾਦਮੁਖੇ ਪੱਥਰ ਕੋ ਜੋ ਤੇਰਾ ਹੋਰਨ ਤਾਂ ਸੀਗਾ ਕਿ ਭਾਈ ਤੁਸੀਂ ਦੀ ਹਜੇ ਹੋਣਾ ਪੱਥਰ ਵਰਗੇ ਹਜੇ ਰਹਿਣਾ ਨਹੀਂ ਤੁਸੀਂ ਕਬੂਲ ਕਰਦੇ ਉਹ ਪਤਾਦਰ ਪੱਥਰੇ ਬਣ ਕੇ ਹਾਂਜੀ ਮੈਂ ਅੰਮ੍ਰਿਤ ਸਿੰਚੀਏ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਵਿਖ ਲਹਿ ਜਾਇਆ ਆ ਵਿਖਦੇ ਵਿੱਚ ਆਪਾ ਅੰਮ੍ਰਿਤ ਪਾਈ ਜਾਂਦੀ ਹੈ ਜਿਵੇਂ ਡਿੱਗਦੇ ਵਿੱਚ ਪਾਈ ਜਾਂਦੇ ਕੋੜੀ ਹੁੰਦੀਆਂ ਨਾ ਜਿੰਨਾ ਮਰਜੀ ਅੰਮ੍ਰਿਤ ਸਿੱਟੀ ਜਾਓ ਉਹਦੇ ਵਿੱਚ ਫਲ ਉਹ ਹੀ ਲੱਗਣ ਕਿ ਧੂਰਾ ਹੁੰਦਾ ਫੜ ਜਾ ਰੂਦੀ ਆ ਉਹਦੇ ਵਿੱਚ ਆਪਾਂ ਬਿੱਠੇ ਪਾਲੀ ਨੂੰ ਰੋਜ਼ ਸਿੱਧੀ ਜਾਈਏ ਤੇ ਧੂਰਾ ਦਾ ਧੂਰਾ ਉਹੀ ਰਹਿਣਾ ਉਹਦਾ ਆਪਣੇ ਆਪਣਾ ਜਿਹੜਾ ਹੈਗਾ ਗੁਣ ਧੂਰੇ ਆਲਾ ਉਹਦੀ ਖਣਨ ਜਿਹੜਾ ਖਾਊਗਾ ਫਰੂਗਾ ਫੜ ਹੀ ਫੜ ਲੱਕ ਹਾਂਜੀ ਨਾਨਕ ਸੰਗਤੀ ਮੇਲ ਹਰ ਸਭ ਵਿਖ ਲਹਿ ਜਾਇਆ ਤਾਂ ਤੂੰ ਆਪਣੀ ਸੰਗਤ ਦੇ ਵਿੱਚ ਮਿਲ ਲੈ ਮੇਰੀ ਸਾਰੀ ਬੇਸ ਤੂੰ ਨਾ ਦੇ ਮੇਰੇ ਤੇ ਨਾ ਵਿਖਰੇ ਜਿਹਨਾਂ ਨੂੰ ਵੇਖੀ ਫਾਇਦਾ ਪਾਈ ਉਹ ਰੱਖਣ ਆਪਣੇ ਕੋਲ ਹੈ ਆਪਣੀ ਜੈਲ ਸਾਨੂੰ ਵੇਖ ਲਈ ਲੋੜ ਨਹੀਂ ਇਹ ਕੋਈ ਹਰਦੀ ਸੰਗਤ ਪਕਲਦੇ ਆਪਣੇ ਅੰਦਰ ਹੱਥ ਪਾ ਨਾ ਮਾਇਆ ਦਾ ਪ੍ਰਭਾਵ ਹੈ ਜਿਹੜਾ ਇਹ ਵਿਖੇ ਹੈ ਮਾਇਆ ਦਾ ਧੋਆ ਹੈ ਜਿਹੜਾ ਵਿਖੇ ਹੈ ਤੇ ਰਸ ਵੀ ਜਿਹੜੇ ਰਸ ਕਸਦੇ ਮਾਇਆ ਦੇ ਇਹ ਵਿਖੇ ਹੈ ਤੇ ਲੈ ਜਾਂਦੇ ਹਨ ਇੱਥੇ 16ਵੀਂ ਪੌੜੀ ਦੀ ਸਮਾਪਤੀ ਹੈ ਪਰ ਇੱਕ ਗੱਲ ਹੈ ਕਿ ਆਪਾਂ ਨੂੰ ਇਸ਼ਾਰਾ ਦਿੱਤਾ ਸੀ ਕਿ ਜਾਨੇ ਖਾਣੇ ਨੂੰ ਤੁਸੀਂ ਅੰਮ੍ਰਿਤ ਨਾ ਛਕਾਇਓ ਹੈ ਜੀ ਬਿਖਮੇ ਅੰਮ੍ਰਿਤ ਸਿੰਚੀਏ ਬਿਖਾ ਫਲ ਪਾਇਆ ਤੇ ਤਾਂ ਹੀ ਅੱਜਕੱਲ ਅੰਮ੍ਰਿਤ ਧਾਰੀ ਹੈ ਉਹ ਜ਼ਿਆਦਾ ਬਦਨਾਮ ਹੈ ਕਿ ਉਹਨਾਂ ਨੇ ਅਧਿਕਾਰੀ ਦੀ ਉਹਨਾਂ ਹਾਂਜੀ ਇਹ ਲਿਖਿਆ ਤਾਂ ਹੈ ਨਾ ਬਿਖਮੇ ਅੰਮ੍ਰਿਤ ਸਿੰਚੀਏ ਬਿਖਾ ਫਲ ਪਾਇਆ ਉਹਦੀ ਆਦਤ ਨਹੀਂ ਤੁਸੀਂ ਬਦਲ ਸਕਦੇ ਮਰਜੀ ਆਪਣੀਓ ਕਰਦੇ ਹਾਂ ਗੁਰਬਾਣੀ ਜਰੂਰ ਪੜ੍ਹਦੇ ਜਦ ਤੱਕ ਨਾਨਕ ਸੰਗਤ ਹੀ ਮੇਲ ਹਰਮਨ ਔਰ ਚਿਤਰੀ ਸੰਗਤ ਨਹੀਂ ਹੋਊਗੀ ਜਥਾ ਹੀ ਲੈਂਦੀ ਹੈ ਜਿਹਨਾਂ ਜਰ ਵਾ ਦੇਖਦਾ ਹੀ ਨਹੀਂ ਹੈ ਅਜਿਹੇ ਤੱਕ ਕੀ ਕਰੂੰ ਕਹਿੰਦਾ ਪਹਿਲਾਂ ਗੁਰਬਾਣੀ ਵਾਲੇ ਦਸਨਾ ਜ਼ਰੂਰੀ ਹੈ ਸਿਰਫ ਕਕਾਰ ਪਾਉਣ ਨਾਲ ਅੰਮ੍ਰਿਤ ਦੀ ਐਸੇ ਦਾ ਪਾਹੁਲ ਲੈ ਅੰਮ੍ਰਿਤ ਅਸੀਂ ਵਰਤਨਾ ਸ਼ੁਰੂ ਕੀਤਾ ਹੁਣ ਅੰਮ੍ਰਿਤ ਛਕ ਲਿਆ ਫਿਰ ਫਿਰ ਤਾਂ ਗੁਰਬਾਣੀ ਲੋੜ ਹੈ ਦੀ ਅੰਮ੍ਰਿਤ ਨਾਮ ਸੀਗਾ ਉਹਦੀ ਵੀ ਤਾਂ ਲੋੜ ਹੈ ਤੂੰ ਤਾਂ ਪਹਿਲਾਂ ਛਕ ਲਿਆ ਤੇ ਕਦਾ ਜੱਗ ਹੀ ਹੋ ਗਿਆ ਉਹ ਫਿਰ ਉਹਨੇ ਸਿੱਖਿਆ ਤੇ ਕੀ ਲਾਣ ਹਾਂਜੀ ਸਿੱਖਿਆ ਲੈ ਕੇ ਸਿੱਖੇ ਬਣਨਾ ਸੀ ਉਹ ਤਾਂ ਬਣਿਆ ਬਣਾਇਆ ਸਿੱਖ ਠੀਕ ਹੈ ਜੀ ਇਹਨਾਂ ਗੱਲਾਂ ਦਾ ਖਿਆਲ ਨਹੀਂ ਅਸੀਂ ਰੱਖਿਆ ਇਹਨਾਂ ਗੱਲਾਂ ਦਾ ਨੁਕਸਾਨ ਵੀ ਹੋਇਆ ਠੀਕ ਹੈ ਜੀ ਇੱਥੇ 16ਵੀਂ ਪੌੜੀ ਸਮਾਪਤੀ ਹੈ ਜੀ